ਮਨ ਕਾਮਨਾ ਤੀਰਥ ਦੇ ਛੁਟੇ ਮਨ ਵਿੱਚ ਕਾਮਨਾ ਹੁੰਦੀ ਹੈ ਵੀ ਤੀਰਥ ਤੇ ਜਾਵੇ ਮੇਰਾ ਸੇਠ ਛੁਟੇ ਗਰਗੁਵਾਨ ਗਰਗੁਵਾਨ ਨਾ ਮੈਂ ਮੰਤੇ ਛੁਟੇ ਫਾਜਲਾ ਉੱਥੇ ਜਾਵੇ ਜਿਹੜੀਆਂ ਗੱਲਾਂ ਸੁਣ ਰਹਿਣਾਂ ਦੀਆਂ ਘਰ ਦੇ ਬਣਾ ਕੇ ਉੱਥੇ ਰਾਤ ਵੀ ਦੇ ਦਿੰਦੇ ਨੇ ਗਰਗੁਵਾਨ ਮੁਸਤਕਿਆ ਇਹਦੀ ਤੇ ਤੀਰਥ ਦੇ ਛੁਟਣਾ ਤੇ ਮੁਸਤਕਿਆ ਸੋਚ ਕਰੇ ਦਿਨ ਸਾਰਾ ਰਾਤ ਚੰਦਾ ਦੇਣਾ ਰਾਤ ਕਰਦਾ ਭਈ ਮੁਕਤੀ ਪ੍ਰਾਪਤ ਨਹੀਂ ਚਾਹੀਦੀ ਗਿਆ ਮਿਲਿਆ ਦੀ ਨਾਮ ਨਹੀਂ ਮਿਲਿਆ ਮੈਨੂੰ ਉਹ ਨਹੀਂ ਮਿਲਿਆ ਮੇਰਾ ਮੰਦੀਜਤ ਹੋਇਆ ਮੈਂ ਤੇ ਬੁੱਧੀ ਮੇਰੇ ਸੋਚ ਵੀ ਕਰਦਾ ਆ ਭੁਜਾਉਂਦਾ ਵੀ ਹੈ ਦੀ ਮੰਨ ਕੇ ਮੈਂ ਨੂੰ ਤਨ ਤੇ ਜਾਤ ਆ ਬਾਦਸ਼ਹੀ ਨਾਲ ਜੁੜਿਆ ਬਾਦਸ਼ਹੀ ਵੀ ਕਰਿਆ ਕਰਦਾ ਹਾਂ ਬਹਿਲ ਮੁੰਦੇ ਵਿੱਚ ਮੁੰਡਾ ਲੈ ਬੰਦਾ ਕੰਪਿਊਟਰ ਨਾਮ ਦਾ ਬਰਦਾ ਨਾਮ ਦਾ ਨਾਮ ਦਾ ਮਨੂ ਤੋਂ ਹੋਂ ਦਾ ਸੋਨ ਦਾ ਨਾਮ ਕਰਦਾ ਧਿਆਨ ਨਾਲ ਧਿਆਨ ਦਾ ਰੱਖ ਮੰਨੂ ਚਾੜਦਾ ਉਹ ਗਿਆਨ ਵਾਲਾ ਤਾਂ ਕੀਤਾ ਨਹੀਂ ਸਰੀਰ ਨਾਲ ਸੰਬੰਧਿਤ ਕਰਿਆ ਹੁਣ ਤਾਂ ਬਾਹਰ ਲੈ ਉਹਦਾ ਅੰਦਰ ਤੇ ਬਾਹਰ ਤੇ ਉਹ ਹੰਕਾਰ ਦਾ ਸਰਦਨ ਮਹਾਰਾਜ ਨੂੰ ਬੋਲਦਾ ਮੈਂ ਤਾਂ ਬੋਲਦਾ ਕਿਸੇ ਦਾ ਰਿਜਲ ਕੋਈ ਹੁੰਦਾ ਨਹੀਂ ਮਨ ਵਿੱਚ ਨਿਸ਼ਾਨੀ ਨਹੀਂ ਹੁੰਦੀ ਮਨ ਨੂੰ ਸ਼ਾਂਤੀ ਆਲਾ ਕਦੇ ਨਹੀਂ ਤੋ ਕੋਈ ਕਰਦਾ ਮਨ ਨੂੰ ਸ਼ਾਂਤੀ ਆਲਾ ਨਹੀਂ ਕੋਈ ਕੰਮ ਕਰਦਾ ਜੇ ਜਿਹੜਾ ਸੱਚੀ ਹੋ ਗੀ ਤੇ ਰੋਟੀ ਵੀ ਆਪੇ ਮਰਨਾ ਦੀ ਬਣਾ ਕੇ ਦਿੱਤ ਇੱਕ ਵੀ ਉਹ ਮਨ ਸ਼ਾਂਤੀ ਵਾਲੀ ਗੱਲ ਨਹੀਂ ਆ ਰੋਟੀ ਸਾਰੀ ਦੁਨੀਆ ਨੂੰ ਮਿਲਦੀ ਹੈ ਬੜੇ ਬੜੇ ਵੀਰ ਆਸ ਵੀਰ ਨੂੰ ਇਹਨਾਂ ਨੂੰ ਸ਼ਾਂਤੀ ਹੋ ਤੈਨੂੰ ਤਾਂ ਉਹਨੂੰ ਤਾਂ ਮਿਲਦਾ ਜਿਹਦੇ ਆਪਣੇ ਘਰ ਅੰਦਰ ਨਹੀਂ ਹੈ ਉਹਨਾਂ ਨੇ ਮੰਨੂ ਕਿ ਜਦ ਤੱਕ ਇਹ ਰੋਟੀ ਨਾਲੇ ਸ਼ਾਂਤੀ ਹੁੰਦੀ ਉਹਨਾਂ ਨੂੰ ਮਿਲ ਨਹੀਂਦੀ ਤੇ ਤੁਹਾਨੂੰ ਨੇ ਤੇ ਖਾਣੀ ਉਹਨਾਂ ਨੂੰ ਯਾਦ ਹੀ ਹੈਗੀ ਥੋੜੂ ਬਕਰੋ ਜੀ ਇਹ ਬਸ ਉਹ ਨਹੀਂ ਸਿੱਖੋ ਇਹ ਲੋੜਾਂ ਹੋਣੀਆਂ ਹੋਣੇ ਸ਼ਾਂਤੀ ਹੋ ਜੀ ਜੇ ਹੁੰਦਾ ਜਿਹਨਾਂ ਦੀ ਲੋੜਾਂ ਹੋ ਰਹੀਆਂ ਨੂੰ ਸ਼ਾਂਤੀ ਹੋਣੀ ਚਾਹੀਦੀ ਸੀ ਹੁਣ ਤਾਂ ਪ੍ਰੈਕਟੀਕਲੀ ਗੱਲੇ ਵੇਲੇ ਹੋ ਜੀ ਇਸ ਬਹੁਤ ਸਾਧਨਾ ਕਰੇ ਇਸ ਦੇਹੀ ਕੋ ਅਜੇ ਬਾਹਰ ਦੇ ਵਿੱਚ ਸਾਧਨਾ ਨਹੀਂ ਕਰੀ ਬੰਦੇ ਕਹੂ ਨਾ ਵਿਖਿਆ ਡਰੇ ਬੰਦੇ ਨਾ ਵਿਖਿਆ ਡਰੇ 아이 ਡਿ ਵਿਖਿਆ ਇਹਦੀ ਭੁੱਖ ਮੁੱਢ ਤੋਂ ਕੋਈ ਨਹੀਂ ਕਦੋਂ ਲੜੀ ਗਲੋ ਜਦ ਤੋਵੇ ਬਹੁ ਦੇ ਬਨੀਤ ਜਦ ਤੋਵੇ ਬਹੁ ਜਲਨ ਤੋ ਹੈ ਜਦ ਤੋਵੇ ਬਹੁ ਦੇ ਬਨੀਤ ਦੇਈ ਅਨੀਤ ਪ੍ਰੀਤ ਕੇ ਨਹੀਂ ਜਿਨਾ ਵੇ ਸਦੀਰਾਂ ਨੂੰ ਅਨੀਤ ਹੈ ਦੀ ਤੇ ਯਾ ਤੁਹਾਨੂੰ ਜਨ ਕੋਈ ਨਾ ਘਲਣਾ ਨਾ ਨੂੰ ਜਨਾ ਤੋਂ ਸੁੱਧ ਕਰਨਾ ਉਹ ਕੱਚੀ ਭੀਤ ਇਹ ਫਿਰ ਅੰਦਰੋਂ ਅੰਦਰੋਂ ਦਾ ਗੰਦਾ ਇਹ ਬੜਾ ਤੋਜ਼ ਹੈ ਉਥੈ ਨਾਲ ਦੇ ਵਿੱਚ ਗੰਦਾ ਉਹ ਤੋਜ਼ ਹੈ ਤੇ ਢੋਈ ਜਾਣਾ ਤੂੰ ਪਰ ਫੇਰ ਧੋ ਲੈ ਫਿਰ ਦੇਖ ਲੈ ਲੈਦਰ ਹੈ ਕਿ ਨਹੀਂ ਫਿਰ ਉਸਨੂੰ ਲੈ ਫਿਰ ਰਹਿਮ ਦਾ ਟੋਕੇ ਇਹ ਠੀਕ ਹੈ ਸਾਦੇ ਢੋੜੀ ਦਿੰਦੀ ਹੈ ਦੋੜ ਜਾ ਬੰਦੇ ਤੇ ਵੇ ਬਾਹਰ ਹੀ ਦੱਸ ਪਰ ਉਹ ਧਰਮ ਦੇ ਕਰ ਵਿੱਚ ਤੁਲਦਾ ਕੇ ਤੋਂ ਹੁੰਦਾ ਨਾ ਗਰੇ ਟੈਂਸ਼ਨ ਜਿਹੜੇ ਗੰਦੇ ਪਾਣੀ ਦੇ ਉੱਥੇ ਨਾ ਲੈਂਦੇ ਨਾ ਇਸ ਰੋਹਣ ਦਾ ਪਾਣੀ ਪੋਦ ਕਸਾ ਹੁੰਦਾ ਹੈ ਪਾਣੀ ਥੋੜਾ ਹੁੰਦਾ ਹੁੰਦਾ ਇਹ ਉਹ ਉੱਤਰ ਨਾਲ ਪਾਣੀ ਨਹੀਂ ਹੁੰਦਾ ਪੈਗੀ ਜਦ ਗਾਲੇ ਅਰ ਅੱਜਾ ਨੇ ਤੋ ਗਰੋਗੇ ਤੇ ਇਹ ਬਸ ਪਾਣੀ ਇਹ ਜਾਣੀ ਇੱਕ ਮੰਤਾ ਜਿਹੜੀ ਸਾਡੀ ਹੈ ਨਾ ਐਵੇਂ ਅਗਿਆਨਤਾ ਵੀ ਬੋਲਦਾ ਉਹ ਕਹਿੰਦਾ ਜਨਤ ਹੋਵੇ ਸ਼ੁੱਧ ਗਹਾ ਹੋਏ ਕਾਚੀ ਭੀਰ ਤੇ ਚਲ ਬਾਹਰ ਸ਼ੁੱਧ ਜਿਹੜੀ ਅੰਦਰ ਹੈ ਇਹਨੇ ਕਹਿੰਦੀ ਆ ਉਹ ਤਾਂ ਸ਼ੁੱਧ ਚਲ ਬਾਹਰ ਮੰਡੀ ਬਹੁਤ ਵਧੀਆ ਪਾਣੀ ਸ਼ੁੱਧ ਆਪਾਂ ਮੁਝ ਵੀ ਲੈਣੀ ਹੋਗੀ ਪਰ ਅੰਦਰ ਰੰਗ ਦੇ ਗੰਦੌ ਗਿਤੇ ਜੋ ਇਹ ਰੰਦੋਏ ਸੁਧਰਾ ਇਹਨੂੰ ਕਹੋ ਸਭ ਸੁਧਰਾ ਗੈਲੋ ਸੁਧ ਕਹਾ ਹੋਏ ਕਾਚੀ ਭੀਤ ਉਹ ਸੁਧ ਚੀਜ ਹੋ ਰਹਾ ਸਭ ਸੁਧਰੀ ਹੋ ਰਹਾ ਜੋ ਜਨ ਤੋਂ ਵੀ ਬਹੁ ਦੇ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਇਤਰੋ ਇਤਰੋ ਮਨ ਹਰ ਕੇ ਨਾਮ ਕੀ ਮਹਿਮਾ ਊਚ ਬਣਾਉਣਾ ਉਹ ਆਂਜਲਾ ਹਰਕਾਰ ਨਾਲ ਜਿਹੜੀ ਮੈਂ ਦੋਣਾ ਕਿ ਬੜੇ ਚੰਗੇ ਹੈ ਤਾਂ ਇਹ ਉਪਦੇਸ਼ੀ ਨਾਮ ਕੀ ਮਹਿਮਾ ਉੱਚ ਇਹ ਉੱਚ ਅਵਸਥਾ ਦੀ ਗੱਲਾਂ ਨੇ ਨਾਨਕ ਨਾਮ ਉਧਰੇ ਸਤਿ ਸਤ ਬਹੁਤ ਉੱਚ ਨਾਨਕ ਦਾ ਨਾਮ ਉਧਰੇ ਨਾਮ ਨਾਲ ਉਹਦਾ ਇਜ਼ਹਾਰ ਹੋ ਗਿਆ ਦਾ ਵੀ ਬਹੁਤ ਤਕੜੇ ਪਤਤ ਜਿਹੜੇ ਤਕੜੇ ਮੋਹੂਤ ਉਹ ਤਕੜੇ ਹਾਂ ਜਿਆਦਾ ਪਤਤ ਨੂੰ ਪਤਤ ਤੇ ਕਹਿ ਰਹੇ ਨੇ ਕਿ ਕਹਿੰਦੇ ਸੀ ਪਤਤ ਨਾਲ ਹੋਰ ਵੀ ਬੂਝ ਲਾ ਗਿਆ ਉਹ ਤਾਰੋ ਕਹਾਈ ਬੀਧੀ ਨਾਲ ਜਦ ਅਬਦਾਸ ਕਹਾਈ ਪੜਨ ਤੰਦੀ ਕੱਦਾ ਕਰੂਲ ਵਿਜ਼ਿਓ ਤਾਂ ਇਹਨਾਂ ਦੇ ਹਿਸਾਬ